जय भगत स्वागत है आप जय प्रसरे पासार संत परदा जय भगत बोलो अबनाथ भक्त चित्तै भगत है अपने अंदर एक भक्त मेरे चित्तै ਉੱਥੇ ਹੀ ਆਪ ਕਿਹਾ ਜਾਵੇ ਹੈ ਉੱਥੇ ਇਹਦਾ ਉਹੀ ਉੱਥੇ ਇਹਦਾ ਮੂਲ ਯਾਨੀ ਉਹੀ ਉਹਦਾ ਮੂਲ ਜੀਵ ਦਾ ਮੂਲ ਕਿੱਥੇ ਹੈ ਜੀਵ ਦਾ ਨਿਜ ਘਰ ਕਿੱਥੇ ਹੈ ਜੈ ਆਪ ਗੁਰੂ ਦਾ ਭਗਤ ਉੱਥੇ ਹੀ ਇਹ ਸੰਦੇਸ਼ ਸ਼ਬਦ ਵੀ ਉੱਥੇ ਹੀ ਹੈ ਨਾਮ ਵੀ ਉੱਥੇ ਹੀ ਹੈ ਆਪੀ ਉੱਥੇ ਆ ਇਹਨੂੰ ਉੱਥੇ ਜਾਣਾ ਪਵੇ। ਚਾਹੇ ਆਪ ਜੈ पसਰੇ ਪਸਾਰ ਸੰਤ ਪ੍ਰਤਾਪ। ਸਰ पसਰੇ ਪਸਾਰ ਸੰਤ ਪ੍ਰਤਾਪ। ਸੰਤ ਦਾ ਪ੍ਰਤਾਪ ਦਾ ਹੀ ਪਸਾਰ ਹੈ ਉੱਥੇ। ਉੱਥੇ ਇਹਨੂੰ ਗਿਆਨ ਹੋਣਾ ਹੈ ਉੱਥੇ ਪਸਾਰਾ ਹੋਣਾ ਹੈ ਸੰਤ ਪ੍ਰਤਾਪ। ਉੱਥੇ ਉਹ ਸੰਤ ਦਾ ਪ੍ਰਤਾਪ ਜਿਹੜਾ ਬ੍ਰਹਮ ਗਿਆਨੀ ਕਰਬਾਣਾ। ਪਰਗਾਜ਼ ਉਥੋਂ ਪਰਗਾਜ਼ ਉਥੋਂ ਪਸਰਦਾ ਹੈ ਹਿਰਦੇ 'ਚ ਪ੍ਰਗਾਜ਼ ਬਾਤ ਉੱਡਾ ਦੇ ਜਿਹੜਾ ਬ੍ਰਹਮ ਕਾਰਨੀ ਕੇ ਮਨ ਪ੍ਰਗਾਜ਼ ਹੈ ਛੇ ਮਨ ਜਾ ਕੇ ਉੱਥੇ ਜਾਊਗਾ ਆਪ ਉਥੋਂ ਪਸਾਰਾ ਤਾਂ ਲੱਗਣਾ ਦੁਨੀਆਂ ਦੇ ਵਿੱਚ ਚਲੋ ਉਹ ਜਿਹੜਾ ਚੰਨ ਹੈ ਉਥੋਂ ਜਨਮ ਹੋਣ ਵਾਲਾ ਜਿਹੜਾ ਜਦ ਤੇ ਜੋ ਚਾਹ ਭਗਤੋ ਚੰਨ ਪਕਤੀ ਦਾ ਚੰਨ ਉਥੋਂ ਝਰੂਣ ਉਹ ਹੈ ਜੈਸੇ ਧਰੂਪਰ ਅਕਾਸਿਤ ਜਿਹੜੇ ਹੋਰ ਚਾਹਨ ਨੇ ਥੋਨੇ ਅੱਗੇ ਗਿਆਨ ਦੇ ਦਿਮਾਗ ਚ ਹੁੰਦੇ ਨੇ ਉਹ ਉਹ ਥੋੜੀ ਫਸੋਦੇ ਉਹ ਇੰਦਾ ਚਾਹ ਨਹੀਂ ਪਹੁੰਚ ਸਕਦਾ ਉਹ ਹਿੰਦਾ ਜੋ ਮਤਲਬ ਉਹਦਾ ਪਸਾਰਾ ਦਿਮਾਗ ਦੇ ਵਿੱਚ ਹੈ ਜਿਹੜੇ ਦਿਮਾਗ ਦੇ ਆਲੇ ਵਾਲੇ ਉਹ ਦੁਖੂਦੇ ਨੇ ਨਾ ਉਹਰਾ ਉਹ ਦੁਨੀਆਵੀ ਗਿਆਨ ਵਾਲੇ ਕਿਸਾਰਾ ਚਾਹ ਕ੍ਰਿਸ਼ਨ ਹੋਵੇ ਚਾਹ ਰਾਮਚੰਦਰ ਹੋਵੇ ਚਾਹ ਬਿਸ਼ੂ ਹੋਵੇ ਜੀਤੇ ਵੀ ਸਿਰ ਤੇ ਉੱਤੇ ਦਿਖਾਉਂਦੇ ਰਹਿਣ ਉਹ ਮਨਮਤ ਦਾ ਸੁਧਿਆਪੀ ਗਿਆਨ ਦਾ ਦਰ ਭਗਤੀ ਦਾ ਜ਼ੈਰਾਦੀ ਹੈ ਉਹ ਉਹ ਜਿਉ ਭਗਤੀ ਹੈ ਤਾਂ ਕਰਮ ਧਰਮ ਪਾਖਾੜ ਵਾਲੀ ਭਗਤੀ ਹੈ ਜਿਹੜਾ ਉਹ ਜ਼ੈਰਾ ਜੇ ਹੈ ਵੀ ਜਿਹੜਾ ਸਰਦੇ ਆਲੇ ਨਾਲੇ ਖੁੱਲਦੇ ਨੇ ਉਹਰਾ ਉਹ ਦੁਨੀਆਂ ਦੇ ਪਰਪੰਚ ਦੇ ਵਿੱਚ ਪਰਪੰਚ ਦੀ ਭਲਾਈ ਕਰਨ ਦਾ ਦਾਅਵਾ ਕਰਦਾ ਹੈ ਪਰਪੰਚ ਦਾ ਹਿੱਸਾ ਬੰਦਾ ਹੈ ਹਿੱਸਾ ਬੰਦੇ ਕੇ ਜ਼ਿੰਮੇਵਾਰੀ ਉਹ ਵੀ ਉਹ ਜਿਹੜਾ ਬੋਝ ਪਾਇਆ ਨਾ ਦਿਮਾਗ ਤੇ ਉਹਨੇ ਹੋਂਦੇ ਉਹ ਪੈਦਾ ਉਹ ਬੋਝ ਦਸਾਇਆ ਉਹਦੇ ਦਿਮਾਗ ਤੇ ਬੋਝ ਆਇਆ ਉਹ ਸਰਦਾਰ ਦੀ ਚਿੰਤਾ ਰਾਜ ਦੀ ਹੁੰਦੀ ਹੈ ਆਪਣੇ ਰਾਜ ਦੀ ਚਿੰਤਾ ਹੀ ਹੁੰਦੀ ਹੈ ਜਿਸ ਕੋ ਪਰਵਾਸ ਦੇ ਬੁਖੀ ਨੂੰ ਪਰਵਾਸ ਦੀ ਚਿੰਤਾ ਹੁੰਦੀ ਹੈ ਜਦ ਇੱਕ ਜੇਸ਼ ਦੇ ਬੁਖੀ ਨੂੰ ਦੇਖਦੀ ਚਿੰਤਾ ਹੁੰਦੀ ਹੈ ਜਦ ਉਹ ਦਿਮਾਗ ਦਾ ਜ਼ਿਆਰਾ ਹੁੰਦਾ ਹੈ ਦਿਮਾਗ ਤੇ ਹੁੰਦੀ ਜਲਤੇ ਅਸਰ ਹੁੰਦਾ ਹੈ ਸਭ ਤੇ ਦਿਮਾਗ ਦਾ ਜਲਤੇ ਅਸਰ ਤੇ ਉਹ ਸੋਚਦਾ ਹੀ ਜਾਦਾ ਉਹ ਦਿਮਾਗ ਦੇ ਉੱਤੇ ਵਰਦਾ ਜਲਤੇ ਅਸਰ ਪੈਂਦਾ ਦਾ ਹਾਰਟ ਫੇਲ ਕਰ ਦਿੰਦਾ ਉਹ ਜਿਹਦਾ ਦਿਲ ਦੇ ਉੱਤੇ ਜ਼ਿਆਦਾ ਚੱਲਦਾ ਉਹ ਜਿਹਦਾ ਦਿਲ ਤੋਂ ਜ਼ਿਆਦਾ ਚੱਲਦਾ ਦਿਮਾਗ ਨੂੰ ਫੇਲ ਕਰ ਦੂ ਜਿਹਦਾ ਦਿਮਾਗ ਤੇ ਜ਼ਿਆਦਾ ਦਿਲ ਨੂੰ ਫੇਲ ਕਰ ਦਿੰਦਾ ਬੰਦੀਆਂ ਬਿਮਾਰੀਆਂ ਪੈਦਾ ਕਰਦਾ ਜਿਹੜਾ ਦਿਲ ਤੋਂ ਗਿਆਨ ਝੂਠਾ ਦਿਮਾਗ ਫੇਲ ਕਰਦਾ ਆਪਣਾ ਦਿਮਾਗ ਹੀਲੇ ਸ਼ਰਾਤਾਂ ਹੋ ਜਾਂਦਾ ਫੇਲ ਹੋ ਜਾਂਦਾ ਕੰਮ ਨਹੀਂ ਕਰਦਾ ਦਵਾਈ ਦੇ ਸੇ ਲੋੜੇ ਦੀ ਬਿਨਾਂ ਦਿਮਾਗ ਦੇ ਗਿਆਨ ਨੂੰ ਦੋ ਨਾਮ ਸਦਾ ਦਿਮਾਗ ਦਾ ਸ਼ੈਤਾਨ ਦਾ ਚਰਖਾ ਇਹਦੀ ਲੋੜ ਨਹੀਂ ਹੈਗੀ ਸ਼ੈਤਾਨ ਦੇ ਕਰਕੇ ਸਿਰ ਸ਼ੈਤਾਨ ਦਾ ਚਰਖਾ ਫੇਲੇ ਉਦੋਂ ਹੁੰਦਾ ਜਦੋਂ ਚਿਰਚੋਂ ਪ੍ਰਕਾਸ਼ ਉੱਠਦਾ ਜਦੋਂ ਦਿਲ ਦੇ ਵਿੱਚੋਂ ਅੰਦਰ ਦੀ ਆਵਾਜ਼ ਦਾ ਪ੍ਰਕਾਸ਼ ਬਦਲਣ ਲੱਗਦਾ ਜਦ ਫਿਰ ਦਿਮਾਗ ਜਾਂਦੇ ਫਿਰੋਂ ਉਹ ਦਿਮਾਗ ਦੇ ਜੋ ਗੱਲ ਰੁੱਸਦੀ ਹੈ ਜੋ ਉਹਨਾਂ ਦਾ ਤਾਂ ਵਿਰੋਧ ਆ ਦੁੱਚ ਜੇ ਤਾਂ ਦਿਮਾਗ ਦੇ ਫੁਰਨਾ ਨੇ ਦਿਲ ਦੇ ਫੁਰਨੇ ਦਬਾ ਲਏ ਜੇ ਤਾਂ ਦਿਮਾਗ ਦੇ ਫੁਰਨਾ ਨੇ ਦਿਲ ਦੇ ਫੁਰਨੇ ਦਬਾ ਲਏ ਸਦਾ ਹਾਰ ਨਹੀਂ ਬੇਲੂ ਜਿੱਦਾਂ ਵੀ ਬਦੂਗੀ ਹੰਕਾਰ ਵੀ ਬਦੂਗਾ ਪਰ ਮੈਂ ਵੀ ਬਦੂਗਾ ਪੈ ਵੀ ਬਦੂਗਾ ਬਹੁ ਵੀ ਬਦੂਗਾ ਸੇ ਤਾਂ ਨਰਕੀ ਦੀ ਵਾ ਨਰਕ ਜੇ ਰੱਖੂਗਾ ਅਰ ਹੋਰ ਵੀ ਹੋਰਾਂ ਵੀ ਨਰਕ ਦੇ ਵਿੱਚ ਕੱਦੂਗਾ ਉਹਦਾ ਉਪਦੇਸ਼ ਵੀ ਨਰਕ ਜੇ ਰਹਿਣ ਦੀ ਗੱਲ ਕਰੂਗਾ ਸੰਸਾਰ ਨਾਲ ਜੋੜ ਕੇ ਰੱਖੂਗਾ ਸੰਸਾਰ ਨਾਲ ਛੁੜਿਆ ਤਾਂ ਸੰਸਾਰ ਨਾਲ ਜੋੜ ਕੇ ਰੱਖੂਗਾ ਸਰਧਾਰ ਨੂੰ ਸੁਰਗ ਬਣਾਉਣ ਦੀਆਂ ਗੱਲਾਂ ਕਰੂੰਗਾ ਸੁਰਗ ਦੇ ਸੰਸਾਰ ਦੇ ਵਿੱਚ ਹੀ ਦੱਸੂਗਾ ਮੈਂ ਕਾਲਾ ਅਸ਼ਰੂ ਸੁਰਗਿਆ ਹੋਇਆ ਨਾ ਨੇ ਸੁਰਗ ਦੇ ਸੰਸਾਰ ਦੇ ਬਣਾਉਂਗਾ ਜਿੱਤੇ ਧਮਾਕ ਦਾ ਡੈਰਾ ਹਾਵੀ ਰਹੂਗਾ ਤੁਹਾਡੀ ਗਿਆਨ ਜਦੋਂ ਦਿੰਦਾ ਗਿਆਨ ਵਧੂਗਾ ਤੁਹਾਡਾ ਵਾਲਾ ਸਾਰਾ ਫੈਲ ਹੋ ਜੂਗਾ ਇਹ ਦਿੰਦੇ ਗਿਆਨ ਨੇ ਦਿਮਾਗ ਦੇ ਜਨ ਸਾਰੀਆਂ ਮੁਤਫਲ ਕਰਤੀ शैतान दी गार्डन शैतान दी गार्ड तू की कह सकदे ओ शैतान ਦਾ ਘਰ ਜਿਹੜਾ ਪਰਮਾਰਥ ਹੈ शैतान ਦਾ ਕਬੂ ਨਹੀਂ ਹੈ ਹੈ ਤਾਂ ਹਲਦੀ ਗਾਰਡ ਹੈ शैतान ਤੇ ਤਾਂ ਬਸਾ ਦੇ ਖਿਲਾਫ ਹੈ शैतान ਨੂੰ ਤਾਂ ਬਰੋਸਾ ਨਹੀਂ ਜੀਨ ਬਟਾ ਪਰ ਗੁਰਪਤ ਉਨਾਲ ਵੀ शैतान ਤੋਂ ਪ੍ਰਭਾਵ ਹਰ ਮਾਸ ਤੋਂ ਕੋਕ ਕਸ ਤੋਂ ਬਾਹਰ ਨਹੀਂ ਨਾ ਵਿਚ ਘਰ ਤੋਂ ਬਾਹਰ ਨਹੀਂ ਲੱਗਦਾ ਮਾਇਆ ਦਾ ਪ੍ਰਭਾਵ ਸਮਾਤਾ ਇਹ ਮਾਇਆ ਦਾ ਪ੍ਰਭਾਵ ਤਾਂ ਸ਼ੈਤਾਨ ਦਾ ਪ੍ਰਭਾਵ ਉੱਤੇ ਪਣਿਆ ਹੋਇਆ ਸ਼ੈਤਾਨ ਦਾ ਪ੍ਰਭਾਵ ਆਮਲੇ ਆਖੋਦ ਨੂੰ ਉਹ ਡਿਕਲੇਅਰ ਕਰ ਦਿੰਦਾ ਮੈਂ ਮੈਂ ਪਰਮੇਸ਼ਰ ਨੂੰ ਮਨ ਇਹ ਵੀ ਜਨਾਤ ਇਸ ਤਰੀਕੇ ਨਾਲ શ્રી ਖੁਦਾ ਹੋਣਾ ਤੇ ਸ਼ੈਤਾਨ ਬਰਗਾਏ ਗੱਲ ਦੋਸਤਾਂ ਨੂੰ ਦੇ ਕੰਮ ਲੈ। ਫਜ਼ਲ ਦੇ ਪਹਿਲਾਂ ਮਤ ਘਾੜੀ। ਕੋਈ ਚੰਗੀ ਗੱਲ ਨਹੀਂ। ਪਤਾ ਲੱਗਣ ਤੋਂ ਬਾਅਦ ਕਿ ਮਤ ਗਲਤ ਹੈ ਉਹਦੇ ਤੇ ਫਿਰ ਪੈਰੋ ਦੇਣਾ ਫਿਰ ਤਾਂ ਬਿਲਕੁਲ ਹੀ ਸਹੀ ਚਲੋ ਭਲੇ ਇੱਥੇ ਸਭ ਕਰਦਾ ਰਹੇ ਪ੍ਰਚਾਰ ਗੱਲ ਨਹੀਂ ਹੈ। ਫਿਰ ਇਨਸਾਨ पता लग गए थे छड़ देवे थाना पता लग गए थे ना छठे बाद फिर है। उदे पता लगने गया है नुक्सा है फिर भी वो काफिले खड़ेया रहे फिर चैता ने जय अवगत भगत आप जय पसरे पासार संत प्रताप जय पसरे पासार संत प्रताप जदों पसता पासार प्रसन्न लगदा है ਜੰਮ ਦਾ ਹਰਦੇਦੂ ਇਹ ਸੰਤ ਪ੍ਰਤਾਪ ਹੈ ਇਹੀ ਸੰਤ ਪ੍ਰਤਾਪ ਸੰਤ ਦਾ ਜਿਹੜਾ ਪ੍ਰਤਾਪ ਫੈਲਦਾ ਅਸਰ ਜਿਵੇਂ ਸੂਰਜ ਦਾ ਪ੍ਰਤਾਪ ਕੀ ਹੈ ਸੂਰਜ ਤੇ ਸੂਰਜ ਤੋਂ ਸੂਰਜ ਦੀ ਰੋਸ਼ਨੀ ਸੰਤ ਦੀ ਰੋਸ਼ਨੀ ਆ ਜਿਹੜੀ ਫੈਲਦੀ ਹੈ ਗਿਆਨ ਬ੍ਰਹਮ ਮਨ ਪਰਗਾਹ ਜੈਸੇ ਧਰੂਪਰ ਸਾਹ ਸੰਤ ਪ੍ਰਤਾਪ ਹੈ ਸਾਰੂਪਰ ਆਗਾਜ਼ ਹੈ ਸੰਤ ਪ੍ਰਸਾਦ ਦਾ। ਪ੍ਰਸਾਦ ਫੈਲਿਆਗਾ। ਸੰਤ ਪ੍ਰਸਾਦ ਜਦ ਫੈਲਦਾ ਹੈ ਹਿਰਦੇ 'ਚੋਂ ਜਿਹੜੇ ਜਿਤਨੇ ਫੁਰਨੇ ਉੱਠਦੇ ਨੇ ਜਿਲਚੋਂ ਉਹਨਾਂ ਦੇ ਦਿਮਾਗ ਦੇ ਫੁਰਤੇ ਕਰਦੇ। ਬੰਦੇ ਦੇ ਜੋ ਫੁਰਨੇ ਉੱਠਦੇ ਨੇ ਸਭ ਫੇਰਦੇ। ਬੰਦੇ ਸਾਸ ਦੇ ਫੁਰਤੇ ਦੀ। ਪਰਮਾਤਮਾ ਸਭ ਰੱਦ ਕਰਦਾ। ਉੱਪਰ 5000 ਕੈਕੇ ਰੱਦ ਕਰਦੇ। ਕੱਲਾ ਪਰਪੰਚੇਕਾਰ ਕੈਕੇ ਰੱਦ ਕਰਦੇ। ਦਿਮਾਗ ਨੇ ਕੰਮ ਕੀਤਾ ਬਹੁਤ ਬਾਅਦ ਦੇ ਵਿੱਚ ਫਿਰ ਕੰਮ ਕਰਦਾ ਸੀ ਘਰ ਵਿੱਚ ਫਿਰ ਘਰ ਵਿੱਚ ਕੰਮ ਕਰਨ ਲੱਗਦਾ ਦਿਮਾਗ ਆ ਕੇ ਬਾਹਰ ਕੰਮ ਕਰਨ ਲੱਗਾ ਉਹ ਵੀ ਕੁਝ देर ਬਾਅਦ ਜਾਂਦਾ ਦਿਮਾਗ ਕੰਮ ਕਰਦਾ ਪਰ ਨੂੰ ਦੇਖ ਕੇ ਦਿਮਾਗ ਖਿਲਾਇਆ ਪਰ ਨੇ ਦਿਮਾਗ ਖਿਲਾਇਆ ਪਰ ਪੰਛੀ ਨੇ ਸਾਡੇ ਪਰਵੰਤਨਾ ਨਹੀਂ ਸਟਾਰਟ ਹੋਇਆ ਤੇ ਉਦੋਂ ਹੈ ਜੀ ਸਟਾਰਟ ਹੋਇਆ ਸਵਾਗਤ ਹੁੰਦਾ ਸਾਡੇ ਪ੍ਰਬੰਧ ਕਰਦਾ ਕਿ ਬਿਨ ਦੇਖੇ ਸਹੀ ਬਗਾਹ ਅਖਾਜੀ ਬਗਾਹ ਚੱਜੇ ਬਗਾਹ ਵਿੱਚ ਪੱਟ ਦੀ ਸ਼ੁਰੂ ਨਹੀਂ ਹੋਇਆ ਇਸ ਕਰਕੇ ਉਸ ਵੇਲੇ ਵਾਲ ਗੁੱਤ ਹੁੰਦੀ ਉਹ ਤਰ੍ਹਾਂ ਵਾਲ ਗੁੱਤ ਹੈ ਅਧੇ ਪਾਇਆ ਵਾਲ ਗੁੱਤ ਮੇਰ ਵਾਲ ਹੁੰਦੀ ਹੈ ਹਾਂਜੀ ਦੋਹੋਂ पाक ਦਾ ਅਪੇ ਧਨੀ ਉਨਕੀ ਸ਼ੋਭਾ ਉਨਹੋ ਬਣੀ ਦੋ ਬਾਗ ਦਾ ਦੋਨੇ ਪਖ ਦੇ ਅਪੇ ਧਨੀ ਦੋਹਾਂ ਪਖਾਂ ਦਾ ਦੋਹੇ ਪਖ ਦਾ ਆਪ ਦਾ ਧੀਰ ਪਰਪੰਚ ਆਕਾਰ ਦਾ ਵੀ ਆਪ ਦਾ ਧੀਰ ਸੰਤ ਪ੍ਰਤਾਪ ਦਾ ਵੀ ਧੀਰ ਦੋ ਪਾਕੜੇ ਹੋ ਗਏ ਇਕ ਦਾ ਪਰਪਲਜ ਸਰਪੰਚ ਆਕਾਰ ਜੇ ਕੈਦੋਂ ਬਚਾਉਣ ਵਾਲਾ ਸਰਪੰਚ ਆਕਾਰ ਤੋਂ ਉਹ ਗਿੜ ਸੰਤ ਪ੍ਰਤਾਪ ਸੰਤ ਪ੍ਰਤਾਪ ਸੰਤ ਪ੍ਰਤਾਪ ਆਕਾਰ ਦੋਹਾਂ ਦਾ ਮਾਲਕ ਆ ਹੈ ਉਧਰ ਜਾਲ ਬੁਣ ਕੇ ਲਾਇਆ ਇਧਰ ਗਿਆਨ ਦਿੱਤਾ ਜੁੱਤਣ ਤੋੜ ਲਗਾ ਜਾਲ ਆਪ ਬਣਾਇਆ ਅਸਰੀਰ ਆਪ ਦਿੱਤਾ ਮਾਇਆ ਦਾ ਦਸਤਾ ਆਪ ਆਇਆ ਕੋਹੜੀ ਚ ਬਸ ਬਸ ਬਸ ਬਣਾ ਕੀ ਇਹ ਬਣਾ ਇਹਦਾ ਨਾ ਮੋਟਾ ਦਰਖਤ ਬਣੂਏ ਜੈ ਜਾਂ ਮੋਟਾ ਬਾਹ ਇਹਦਾ ਨਾ ਮੋਟਾ ਮੋਟਾ ਦਰਖਤ ਬਣੂ ਸਾਰੀ ਮਾਇਆ ਹੀ ਵੜਦਲੀ ਮਾਇਆ ਦਾ ਦਰਖਤ ਹੈ ਵੜਦਲੀ ਵਾਹ ਲ ਕਰਦਾ ਹੀ ਭਾਇਆ ਉਹ ਦਰਖਤ ਦਾ ਉਸੇ ਮਾਇਆ ਦਾ ਵਹਾਂ ਪਾਇਆ ਕਾਲਿਜ ਉਹ ਵੀ ਇੰਦਰ ਵਰਤ ਬੱਡਲ ਵਾੜੇ ਦਾ ਬੱਡਲ ਕਿਹਦਾ ਬੱਡਲ ਵਾਸਤੇ ਪਾਇਆ ਸੀ ਬਾਹਾਂ ਕਾਲਿਜ ਬਾਹਾਂ ਨੂੰ ਦੇ ਲਈ ਜਦੋਂ ਕਾਲੀ ਦੇ ਦਾ ਅਸੀ ਲਾਉਦਾ ਬਾਹਾਂ ਦੇ ਲਾਉਦਾ ਕਾਲੀ ਨੂੰ ਦਾ ਦਾ ਲਾਵੇ ਜਦੋਂ ਮਾਇਆ ਵੱਢਣੀ ਹੋਵੇ ਆ ਬੰਦੂ ਵਾਲਾ ਗੋਡੀ ਹੋਗੀ ਤਾਂ ਦਾ ਅਰਦੀ ਰੋਡ ਪੈਂਦੀ ਆ ਦਾ ਅਰਦੀ ਰੋਡ ਪੈਂਦੀ ਆ ਇਹਦਾ ਵਾਹ ਨੂੰ ਤੇ ਜ਼ਿਆਦਾ ਲਾਉਂਦਾ ਫਿਰ ਉਹਦੇ ਤੇ ਲਾ ਕੇ ਰੱਖਦਾ ਤਾਂ ਕਿ ਬੜਾ ਸੋਹਣਾ ਲੱਗੇ ਰੱਖਦਾ ਵਾਹ ਨੂੰ ਤਾਂ ਚਾਹੁੰਦਾ ਹੀ ਨਹੀਂ ਵਾਹ ਵੱਡਾ ਹੋ ਜਵੇ ਜਾਂ ਵਾਹ ਮੈਂ ਵਾਹ ਬਟਨ ਨਾ ਮਾਏ ਲੱਗਦਾ ਦਰਤ ਬਣਵਾ ਬਾਹਾਂ ਟੁੱਟ ਜੂਵੇ ਹੋ ਨਹੀਂ ਐ ਇਦਾਂ ਕਰਦਾ ਹਾਂ ਹਾਂ ਦੋਹਾਂ ਪਾਸ ਦਾ ਆਪੇ ਤੇ ਨਹੀਂ ਦੋ ਪਾਸ ਦਾ ਗਿਆਨ ਉੱਥੋਂ ਮਿਲਦਾ ਜਿੰਨੇ ਵੀ ਸਾਇੰਟਿਸਟ ਨੇ ਤੇ ਗਿਆਨ ਵਾਲੇ ਨੇ ਅੱਜ ਇਕੱਠਾ ਆ ਗਿਆ ਗੱਲ ਉਹਨਾਂ ਨੂੰ ਵੀ ਜਿਹੜੀ ਖੋਜ ਆ ਦਰੋਜ ਮਿਲਦੀ ਏ ਜਹਾਂ ਦੇਹਾਂ ਦਾ ਗਿਆਨ ਉਹਨਾਂ ਨੂੰ ਵੇਲੇ ਹੈ ਸੰਸਾਰ ਦੇ ਪ੍ਰਪੰਖ ਆਸ ਦੇ ਵਿੱਚ ਦੇ ਲੋਕ ਗਿਆਨ ਦੀ ਖੋਜ ਕਰਦੇ ਨੇ ਉਹਨਾਂ ਨੂੰ ਮਿਲਦਾ ਰੋਜ ਗਿਆ ਇਲੈਕਟ੍ਰੋਨਿਕਸ ਕੇ ਥਾਈਏ ਅਬ ਸਾਰਾ ਰੋਜਣਾ ਪੁਰਾਣ ਬਿਲਦਾ ਗਿਆਨ ਨਾਲ ਤਾਂ ਕਿੱਥੋਂ ਆਉਂਦਾ ਓਏ ਵੀ ਉੱਥੋਂ ਹੀ ਆਉਂਦਾ ਓਹ ਵੀ ਭਗਤੀ ਉਹ ਕਰਦੇ ਜੇ ਐਵੇਂ ਨਹੀਂ ਆਉਂਦਾ ਉਹਨਾਂ ਨੂੰ ਉਹ ਵੀ ਮੁੰਡੇ ਰੋਟੀ ਰਾਟੀ ਭੁੱਲਣ ਦੇ ਆਂਦੇ ਜੱਡੇ ਜੱਪੜਦੇ ਨੇ ਆਹ ਅਰਦਾਸ ਅੱਜ ਦੀਆਂ ਜਦੋਂ ਰੋਟੀ ਠੰਡੀ ਹੁੰਦੀ ਆ ਦੁੱਧ ਸੰਧਾ ਹੋ ਗਿਆ ਤੋ ਕਹਿੰਦਾ ਮੈਨੂੰ ਤਾਂ ਯਾਦ ਆ ਜਾਂਦੀ ਏ। ਪੱਤੀ ਆ ਵੀ ਉਹਨਾਂ ਦੀ ਪਰਨ ਵਾਲਿਆਂ ਦੀ। ਐਵੇਂ ਨੀ ਜਿਹੜੇ ਜੱਗੇ ਜਿਹੜੇ ਹੁੰਦੇ ਸੀ ਪੱਨ ਵਾਲੇ ਉਹਨਾਂ ਦਾ ਜਿਹੜਾ ਮਨ ਆ ਉਹ ਵੀ ਬੜਾ ਸ਼ਾਂਤ ਹੁੰਦਾ। ਪੱਤੀ ਵਾਲਾ ਬਣੂਦਾਰੂ। ਜੇ ਕਰਕੇ ਇਟਾਲੀਅਨ ਗੁੰਡੇ ਐਂ ਆਉਣ ਨੂੰ ਸਾਰੇ ਜਿਹੜੇ ਸਾਰੇ ਇਟਾਲੀਅਨ ਉਹ ਫਾਈਲੈਂਡਰ ਵਾਲੇ ਸ੍ਰੀ ਵੀ ਉਹ ਤਾਂ ਹੈ ਉਹ ਉਹ ਕੋਲ ਗਿਆ ਜਿਹੜਾ ਹੈਗਾ ਉਧਰ ਵੀ ਕਹਿੰਦੇ ਜਿਆਦਾ ਸਮਾਂ ਕੰਮ ਕਰਦਾ ਹੁੰਦਾ ਤਾਂ ਕੋਈ ਇਧਰ ਪਹਾੜੀ ਵੀ ਟਿੱਕੀ ਆਉਣ ਲੱਗੀ ਨਾ ਇਧਰ ਢਾਰ ਕੋਹਾੜੀ ਵੀ ਲੱਗਣ ਲੱਗੀ ਵਾਹ ਤਾਂ ਹੈ ਸੀ ਉਹਨਾਂ ਕੋ ਵਧੀਆ ਉਹ ਦਮ ਲੈ ਵਾਹ ਤਾਂ ਥਾਈ ਮਜ਼ਬੂਤ ਵਾੜੀ ਤੋਂ ਵੀ ਕੰਮ ਲੈਣ ਲੱਗ ਗਏ ਡਬਲ ਹੋ ਗਿਆ ਉਹਨਾਂ ਦਾ ਕੰਮ ਹਾਂਜੀ ਦੋਹਾਂ ਪਾਸੇ ਆਪੇ ਤਾਂ ਨਹੀਂ ਉਹਨਾਂ ਦੀ ਸੁਭਾ ਉਹਨੂੰ ਵੀ ਕਿਹੜਾ ਬ੍ਰह्म ਗਿਆਨ ਵਾਲਾ ਪਾਸਾ ਇਹ ਵੀ ਇੱਧਰ ਖਜ਼ਾਨਾ ਉਹਦੇ ਕੋਲੇ ਹੈ 2000 6000 ਦੇ ਦੋਨੇ ਗਿਆਨ ਦੇ ਇੱਕ ਮਾਇਆ ਦਾ ਗਿਆਨ ਦਾ ਖਜ਼ਾਨਾ ਇੱਕ ਮਾਇਆ ਤੋਂ ਬਾਹਰ ਨਿਕਲਦੇ ਗਿਆਨ ਦਾ ਖਜ਼ਾਨਾ ਦੋਹੇ ਪਾਸਿਆਂ ਦਾੱਖਾਂ ਦਾ ਖਜ਼ਾਨਾ ਆਪਣੇ ਕੋਲੇ ਹੈ ਉਸ باکا تے سڑی بال کر چاہے جو تو ਤੇ کرو فرنٹے کوئی کوئی دے اب تو کلام نے دھویا گیاں تو دلے بھو دیتا خودی کلاں کٹی جتا نہیں ابیں لیول تے دا لوگو نہیں جے الگ ہے تے رُکیان ہن بہت زیادہ عزت کر دے نے لوگ او ہے نا انہاں لوکاں نوں اسے جے دا پتہ اسے گیان ਸੂਰਤ ਕੀ ਬਦਰੀ ਹੈ ਉਹਨੂੰ ਕੋ ਫਿਰ ਵੀ ਉਹ ਕਿਹੜਾ ਕੋਈ ਘਟਕੀ ਹੈ ਕਿਦਸ ਕਹਿਦੀ ਵੀ ਹੈ ਅਰਜ਼ੂ ਦੀ ਛੋੜੀ ਉਨਕੀ ਸੋਭਾ ਉਹਨੂੰ ਬਣੀ ਉਨਕੀ ਜ਼ੋਭਾ ਨੂੰ ਕਿਉਂਕਿ ਜਦ ਦੋਏ ਪਾਸੇ ਦਾ ਧੜੀ ਹੈ ਅਸਲ ਤਾਂ ਤਸੱਬੋ ਹਸੇ ਦੀ ਹੈ ਪਰ ਸੋਭਾ ਜੇਰਾ ਧੰ ਲੈ ਲੰਦਾ ਸੰਸਾਰ ਚ ਉਹਦੀ ਸੋਭਾ ਉਨ ਨੂੰ ਬੜੀ ਜੇ ਤੋ ਅਗਰ ਜੇ ਧੰ ਮਰਦਾ ਹੈ ਨਾ ਗਿਆਨ ਮਰਦਾ ਹੈ ਜੇ ਲਖਜਾਨੇ ਦਾ ਮਾਲ ਕਰ ਤੋ ਤਾਂ ਉਹਦੀ ਸੋਭਾ ਫਿਰ ਚਲੀ ਆਈ ਜੇ ਦੂਰੇ ਸੰਸਾਰੇ ਗਿਆਨ ਵਾਲੇ ਨੇ ਉਹਨੂੰ ਇਹ ਗੱਲ ਦੱਦਾ ਗਿਆ ਨੇ ਉਹਦੀ ਕਹਿੰਦੇ ਵੀ ਸੰਤੂ ਗੁਰੂ ਮੇਸ਼ਾਹਬ ਦਿੰਦੀ ਹੈ ਸਾਧਰਕ ਇਹ ਸਭ ਜਿਹੜੀ ਗਿਫਟ ਹੈ ਗॉड ਗਿਫਟ ਹੈ ਐਸਾ ਦੂਸਰਾ ਤੇ ਭਾਈ ਆਪਣੀ ਗੱਲ ਨਹੀਂ ਹੈਗੀ ਇਹ ਤਾਂ ਸਤਿ ਪਰਵਾ ਲਿਆ ਸਾਡੇ ਵੱਸ ਦੀ ਗੱਲ ਨਹੀਂ ਉਹ ਇਹ ਗੱਲ ਨਹੀਂ ਕਰਦੇ ਮਾੜੀ ਪੜਾਈ ਮਾਇਆ ਦੀ ਹੈ ਉਹ ਸਭ ਸਾਨੂੰ ਪਤਾ ਲੱਗ ਗਿਆ ਕਦੇ ਕਹਿ ਵੀ ਸਕਦੇ ਕਹਿਣ ਵੀ ਲੱਗ ਜਾਂਦੇ ਡਿਕਲੇਅਰ ਨਹੀਂ ਕਰਦੇ ਜਗਾ ਜਗਾ ਜੋ ਗੁਰਵਾਨ ਦਿਖਲੇ ਜਗਾ ਜਗਾ ਕਰ ਨਾ ਭਲਾ ਬੋਲੇ ਖਸੂ ਐ ਇਹ ਜੀ ਨਹੀਂ ਗੱਲਾਂ ਹੋ ਆਂ ਤੌਰ ਤੇ ਕਰਦੇ ਸ਼ਾਇਦ ਜਿਹੜੂ ਕਰ ਲੱਗ ਜਾਂਦੇ ਨੇ ਫਿਰ ਕਹਿਣ ਲੱਗ ਜਾਂ ਹੁਣ ਐਸੇ ਮਹਿਸੂਸ ਕਰਨਾ ਕਿ ਉਹ ਇਹ ਗੌਰ ਹੁੰਦੀ ਹੈ ਤੁਹਾਨੂੰ ਬੋਲ ਕੇ ਕਹਿੰਦੇ ਨੂੰ ਮਿਲਦਾ ਹਾਂਜੀ ਆਪੇ ਤੌਰ ਤੇ ਕਰੇ आनंद खोज आपे आप रस भोगन निज खोज ने वो खुद आत्मा दी खोज करने लगे रेड़े चले गए वो, वो खुद इतना भेड़े चले गए डीप चले गए माया अब खोज करके वो ਉਦੋਂ ਕੋਈ ਬਚਾ ਨਹੀਂ ਪਰ ਗਿਆਨ ਨੂੰ ਬਚਾਉਂਗਾ। আর ਐਨੇ ਨੇੜੇ چلے گئے, තුਜੇ ਮਤਲਬ ਖਤਰਾ ਪੈਦਾ ਹੋ ਗਿਆ। ਸੰਸਾਰੀਆਂ ਸਾਰੀਆਂ ਮਤਲਬ ਖਤਰਾ ਪੈਦਾ ਹੋ ਗਿਆ। ਜਿਹੜੇ ਇਹਨੇ ਚਲੇ ਗਏ। ਉਹਾਨੇ ਸਾਹੂਦ ਕਰਤਾ। ਕਿਤੇ ਸੁਖਦੇ ਘਲਾਬ ਲੋਕ ਬੋਲਦੇ ਨੇ, ਕਿ ਡਾਕਟਰਾਂ ਸਾਹਿਬ ਕਰਤਾ ਵੀ ਦਵਾਈ ਹੈ। ਤੁਹਾਨੂੰ ਇਹ ਦਵਾਈਆਂ ਬਹੁਤ ਤਕੜੀ ਹੈ ਵੈਸੇ ਉਬਰੀ ਕਾਲਿਆ ਹਰ ਫੁਰਕਾਲੇ ਤੋਂ ਨਹੀਂ ਉਹ ਛੂਟਦਾ ਕੋਈ ਨਹੀਂ ਇਹ ਤਾਂ ਬੈਠ ਠੜਾਏਗਾ ਬਈ ਮੈਂ ਲਾਇਆ ਕਿਨਾਂ ਸੀ ਲਾਇਆ ਕਿਨੇ ਸੀ ਲਾਇਆ ਪੱਟਦੇ ਨਹੀਂ ਹਾਂ ਤਾਂ ਰੰਗ ਤੇ ਉਹ ਜੀ ਤਾਂ ਸੂਰ ਜਾ ਕੇ ਤਾਂ ਹੀ ਆਏ ਨੇ ਇਹ ਲੜਾਈ ਆ ਹੁੰਦਾ ਦੇ ਕੇ ਤਸਵੀਰ ਦਾਪਾ ਬਾਰ-ਬਾਰ ਕਹਿੰਨੇ ਆ ਵੀ ਇਹ ਪੰਡਤ ਰਾਮ ਦਾ ਧਰਮਕ ਬੰਦੇ ਨਹੀਂ ਗੁਰੂ ਕਨੇ ਜੀ ਨੇ ਕਿ ਉਹ ਜੇ ਭਗਤਾਂ ਬੰਨੇ ਨੇ ਧਰਮ ਕਿਹਦਾ ਧਰਮ ਨਹੀਂ ਇਹ ਤਾਂ ਫਰੋਡੀ ਜੋ ਸ਼ਬਦ ਨਾਦ ਦੀ ਗੱਲ ਹੈ ਵੇਦ ਵਿੱਚ ਹੈ ਨਾਦ ਵੇਦ ਵਿਚਾਰ ਆਦਮੇ ਚ ਹੈ ਵੇਦ ਸ਼ਬਦ ਗਿਆਨ ਦਾ ਜਿਹਨਾਂ ਦਾ ਵਿਰੋਧ ਕੀਤਾ ਵੇਦ ਦਾ ਨਾਦ ਦਾ ਵਿਰੋਧ ਸੰਨ ਸਾਸਤ੍ਰ ਹੈ ਉਹਨਾਂ ਕੋਲ ਗੱਲ ਪਹੁੰਚ ਗਈ ਗੱਲ ਤਾਂ ਹਵਾ ਚ ਉੜੀ ਹੀ ਰ ਗਈ ਉਹਨੂੰ ਨਿਕਲ ਹੀ ਗਈ ਗੱਲ ਤਾਂ ਚਲੀ ਗਈ ਉਹ ਕਿਹ ਕੋਲ ਕਿੱਥੇ ਹੋ ਰਹੇ ਨੇ ਨਹੀਂ ਨਹੀਂ ਜੇ ਮੈਂ ਗੱਲ ਨੇ ਕਬਜ਼ਾ ਕਰ ਲਿਆ ਉਹਨਾਂ ਤੇ ਵੀ ਕਬਜ਼ਾ ਕਰਨ ਨੂੰ ਫਿਰਦੀ ਆ ਰਹੀ ਐਸਐਸ ਚਾਹੋ ਤੇ ਉਹਨਾਂ ਦਾ ਅਸਲੀ ਧਰਮ ਸ਼ਿਰ ਭਗਤੀ ਐ ਅਸਲੀ ਭਗਤੀ ਇਹ ਜਿਹੜੀ ਬੇਜਾਨ ਜੁੜੀ ਹੋਈ ਆ ਜਿਹੜੀ ਨਾਦਮ ਜੁੜੀ ਹੋਈ ਆ ਸਾਰੀ ਗੱਲ ਗੁਰਨਾਮ ਕਦੀ ਜਣੀ ਉਹਨਾਂ ਨੂੰ ਦਿੰਦੀ ਐ ਸ਼ਬਦ ਬਾਰੇ ਪਤਾ ਵੀ ਉਹਨਾਂ ਨੂੰ ਹੈ ਕੋਈ ਤਾਂ ਬੱਚੋ ਨਾ ਸਿਰਦੇ ਸਾਰੀ ਗੱਲ ਉਹਨਾਂ ਦੀ ਬੜੀ ਵਾਤਨਾ ਥੋੜਾ ਫਰਕ ਆ ਸਕਦਾ ਹੈ ਗੱਲ ਕਿ ਉਹ ਕਾਦਿਰਲ ਇਹ ਉਹਦੇ ਤੇ ਕਬਜ਼ਾ ਕਰਨ ਨੂੰ ਮੰਨਦੇ ਜਿਵੇਂ ਸਾਡੇ ਆ ਇਹਨਾਂ ਨੇ ਕਹ ਲਿਆ ਸਾਡੇ ਜ਼ਾਂਦੇ ਕਬਜ਼ਾ ਅਕਾਲ ਤਖਤ ਤੇ ਉਹਨਾਂ ਕਹੇ ਕਬਜ਼ਾ ਖਲੇ ਤਾਂ ਧਰਮ ਨੂੰ ਬਲ ਦਰਬੇ ਫੈਲੋ ਬੁੱਢੀ ਪੂਜਾ ਜਿਹੜੀ ਅਸੀ ਜਾਣੀ ਉਹਨਾਂ ਤੋਂ ਵੰਦਨ ਨਾਲ ਉਹ ਉਹ ਚਾਰ ਬੜਨ ਨੂੰ ਦੁੱਤ ਕਹਿੰਦੇ ਜਿਹੜਾ ਸੰਤ ਬਣ ਗਿਆ ਉਹਦਾ ਕੋ ਬੜਨ ਨਹੀਂ ਜੀ ਇਹਾਰੇ ਬੱਡੀ ਜਣਾ ਦੂਏ ਬੱਡੀ ਸਰ ਬੱਡੀ ਜਣਾ ਬੁੱਧਾ ਕਰੀ ਤੋ ਹਾਂ ਆਪ ਝੁਕੀ ਟਕਰਾਇਆ ਬਹੁ ਟਕੜਾ ਇਹਨੋ ਦੋ ਗੱਬਾ ਜੀ ਵੀ ਕਬਜਾ ਕਰਨੀ ਬੈਠੇ ਦੇ ਰੋਂਦਾ ਹੁੰਦਾ ਕਾਸ਼ੀ ਵਿੱਚ ਨਾ ਰੱਖੀਏ ਛੁਪਕੀ ਹੈ ਗਾਸ਼ੀ ਤੁਨ ਆਪੋ ਚ ਲੱਗੇ ਹਾਂ ਜਾਮਾ ਮਾਰ ਕੇ ਬਾਰ ਕਰ ਦੰਦਿਓ ਇਹਦੇ ਸੰਬੰਧ ਨੇ ਆਪਾਂ ਇਹ ਦਿਨ ਬੈਠੇ ਨੂੰ ਕਹਿੰਦੇ ਨੇ ਕਿ ਡੋਟੇਸ ਨੇ ਗਰੰਟਾਈ ਲੈ ਵੀ ਅੰਨਿਆ ਨੂੰ ਮੂੰਹ ਖਾ ਰਿਹਾ ਜਾਂ ਸੀ ਆ ਕਹਿੰਦੇ ਇਹਨਾਂ ਖੱਲਿਆਂ ਨੇ ਘਰੇ ਆ ਹੁਣ ਤੇ ਅਜਿੰਦਾ ਸਿੱਖਣਾ ਹੀ ਆ ਇਤੋਂ ਬਧੇਰਾ ਅਗੰਡਾ ਮਾਲ ਹੋ ਮੁਜਾ ਕਹ ਗਿਆ ਦੇਵਦਿਆਂ ਕੀ ਬਾਰੇ ਤੇ ਨਹੀਂ ਕਰ ਬਧੇਰਾ ਗੋਵੇਧਿਆ ਕਰਦੇ ਤੇ ਫਿਰ ਗੱਜਵੇਂ ਦੇ ਆ ਪਿਆ ਅਸ਼ਮੀਤ ਅਸ਼ਮੀਤ ਵੀ ਉੱਪਰ ਅਸਤੋ ਘੋੜਾ ਪਹਿਲਾਂ ਸਭ ਤੋਂ ਸ੍ਰੇਸ਼ ਇਹ ਘੰਡੇ ਤੇ ਉਹ ਉਹ ਤੋਂ ਬਹੁਤ ਵੱਡਾ ਬਲੀਦ ਦਿੱਤ ਫਿਰ ਗਾਜ ਮੇਰੇ ਆ ਗਏ ਫਿਰ ਗਾਇਤੇ ਵੀ ਪਹੁੰਚੇ ਲਾਈਵੇ ਦਾ ਕਬੂਲ ਦੇ ਰਾਜਾਂ ਗੈਂਡਾ ਹੋ ਜਾਈਆ ਆਦੀ ਨਹੀਂ ਜਗਾ ਗੈਂਡਾ ਕੀਤਾ ਜਦੋਂ ਵੀ ਹਲਾਦੀ ਗੋਦਾਵਰੇ ਜੱਤੀ ਮੁਸਮਾਨਾ ਹੋ ਗਏ ਗੋਪੀ ਛੱਡੀ ਪਹਿਲਾਂ ਕੱਠੇ ਹੀ ਸੀ ਛੱਡੀ ਫਿਰ ਆ ਗਿਆ ਰਾਜਪਿੰਦ ਫਿਰ ਅਸ਼ਬੇ ਦਾ ਆਇਆ ਦੁਪਰ ਜਾ ਕੇ ਦੋ ਤਿੰਨ ਤੇਜੇ ਵੀ ਪ੍ਰਿਸ਼ਣ ਰੌਕ ਨਜ਼ਰ ਦਾ ਵੀ ਅਸ਼ਬੇ ਦੇ ਅੱਗੇ ਜੋ ਬੱਧੀਆ ਸਮੇ ਤੇ ਅਗਰ ਉਹ ਚੌਥੇ ਜੁਗ ਦਾ ਅਜਾ ਬੇਦੇ ਅਗਰ ਬਕਰਾ ਉਹ ਇਹ ਸਾਡੇ ਨਾਲ ਗੱਲ ਕਰਦੇ ਐ ਅਗਾ ਤੇ ਅੰਦਰ ਸਭ ਬਕਰਾਂ ਦੀ ਥੇਲੀ ਨੇ ਇਹਨਾਂ ਨੂੰ ਵੀ ਬਦ ਮਿਸਰੀ ਵਾਲਿਆਂ ਨੂੰ ਗੱਲ ਕੀ ਆ ਇਹ ਵੀ ਪੱਟਦੇ ਨੇ ਪੱਟਦੇ ਇਹਨਾਂ ਦੇ ਖਿਲਾਫ ਹੈ ਇਹ ਪੱਟਤ ਉਧਰ ਪੱਟਤਰ ਉਹ ਲੱਗੇ ਹੋਣੇ ਧਾਰੇ ਸਾਡੇ ਨਾਲ ਬਿਜਲੀ ਵਾਲੇ ਲੱਗੇ ਨੇ ਇਹ ਪੰਡਤ ਦੇ ਛੇਲੇ ਨੇ ਦਵੇਂ ਪੰਡਤ ਆਏ ਜੇ ਨਾ ਵਟ-ਵਟ ਪਾਤੇ ਦੋਏ ਦਾ ਕਹਿ ਦਿਓ ਇਹਾਂ ਕੋਲ ਕੱਖ ਵੀ ਨਹੀਂ ਝੂੜ ਤੇ ਬਣਾਣ ਕੋਈ ਕੁਝ ਨਹੀਂ ਉਹਨਾਂ ਨੇ ਘੜਤਾ ਉਹਨਾਂ ਨੇ ਕਹ ਲੱਖਾਂ ਹੀ ਧੋਮ ਧੋਖਾਗੇ ਤੁਸੀਂ ਦੱਸੋ ਸਿਮਟੀਆਂ ਕੱਢੋ ਸਭ ਕੁਝ ਬਾਹਰ ਆ ਜੂਗਾ ਜੋ ਲਪੋਇਆ ਹੋਇਆ ਲੋਗਾ ਜਿਹੜਾ ਕਹਿੰਦੇ ਸੀ ਨਾ ਭਈ ਅਸੀਂ ਕੌਣ ਨੀ ਜੜੂ ਹੋਰ ਕਿਸੇ ਸੰਸਕਰਣ ਦੀ ਪੜਾਉਣੀ ਤਾਂ ਨਹੀਂ ਪੜਾਉਣੀ ਸਾਰਾ ਝੂਠ ਇਹਨਾਂ ਦੇ ਜਿਹੜਾ ਹੈ ਸੱਚ ਲਿਖਿਆ ਹੋਇਆ ਝੂਠ ਬੁਰਾ ਜਾਂਦਾ ਸੱਚ ਉੱਤੇ ਆ ਜੂਗਾ ਝੂਠ ਚਲੇਗਾ ਅਠਾ ਦਾ ਜਿਹੜਾ ਕੋ ਦੀਆਂ 12 ਨੇ ਝੂਠ ਸਭ ਉੱਡ ਹਵਾ ਦੇ ਵਿੱਚ ਜੋ ਇਹਦਾ ਝੂਠ ਲਗਾ ਹਵਾ ਚ ਉੱਡ ਉੱਡੇ ਗਿਆ ਜਵਾਬ ਨਹੀਂ ਦੇ ਦੇ ਕਿਸੇ ਗੱਲ ਦਾ ਉਹਦਾ ਤਾਂ ਥੋੜਾ ਜਿਹਾ ਪੁਰਾਣਾ ਹੋ ਗਿਆ ਲਾਉਣ ਨੂੰ ਥੋੜੀ ਜਿਹੀ ਫਿਰਤ ਕਰ ਨਹੀਂ ਬੇਸ ਤੇ ਸਾਤ ਗੁਰੂਆਂ ਦੀ ਗੱਲ ਨੂੰ ਹਾਂ ਜੀ ਦੂਹੋਂ ਪਾਸ ਦਾ ਆਪੇ ਧਣੀ ਉਨਕੀ ਸੋਧਾ ਉਨ ਨੂੰ ਬਣੀ ਉਧਰ ਪਾ ਨਾ ਨੇ ਆ ਗਿਆ ਜਹਾਦਰ ਨਾਗੇਸ਼ਰਾ ਆਪੀਂ ਦਰਨ ਨਾਗੇ ਮਾ ਸੁਝਾ ਛਕਦੇ ਨੇ ਇਹ ਧਾਰਮਿਕ ਹੀ ਹੈ ਦੂਏ ਧਾਰਮਿਕ ਦੇ ਨਹੀਂ ਦੂਏ ਪਸੰਚਾ ਖਾਹਰ ਵਾਲੇ ਦੇ ਉਹ ਪਰਪੰਛ ਇਹ ਪਰਪੰਛ ਦੇ ਬਾਹਰ ਦੀ ਉਹ ਪਰਪੰਛ ਜਿਹੜਾ ਆ ਰਿਹਾ ਇੱਕ ਪਰਪੰਛ ਹੀ ਨੇ ਪਰਪੰਛ ਆ ਰਿਹਾ ਨੇ ਇੱਕ ਦੰਦ ਬੋਲ ਜਿਹੜੀ ਦਾ ਫੁਰਦੰਗਾ ਆਇਆ ਇਹ ਵੀ ਦੇਖ ਕੇ ਗਲਾਪ ਹੋ ਗਏ ਉਹ ਛੱਡੋ ਪਰ ਇਹਨਾਂ ਨੂੰ ਹੋਰ ਹਮ ਕਿਹੜਾ ਗਿਆਨ ਹੈ ਕੁਝ ਕੌਣ ਪੁੱਛਦਾ ਇਹਨਾਂ ਨੂੰ ਨਾਲੇ ਇਹ ਦੇਖ ਵੀ ਛੱਡ ਗਏ ਉਹ ਛੱਡਾਂਗੇ ਹੀ ਪਰ ਪੰਚੀ ਦੇ ਦੇਖਦੇ ਵੀ ਲੱਗਦੇ ਨੇ ਫਰੇ ਹੀ ਛੱਡਾਂਗੇ ਤਾਂ ਬੁਕਰਮ ਤਾਂ ਹੈ ਉਹਨਾਂ ਦਾ ਚੰਦਾ ਸੂਰਜ ਨਹੀਂ ਆਗਾ ਸੱਚੰਦਾ ਹੋਇਆ ਹੈ ਸੂਰਜ ਦੀਆਂ ਢਾਂਡ ਪੈ ਸੀ ਆ ਨਹੀਂ ਜਾਤੀ ਕਮੇਟੀ ਦੇ ਉਹ ਵਾਸਤੇ ਬੰਦਾ ਜਿਹੜੀ ਉਹਨਾਂ ਵੀ ਬੰਦਾ ਲੈ ਆਦਾਰ ਸਿੰਘ ਆਦਾਰ ਸਿੰਘ ਚਰੋਣੀ ਕਮੇਟੀ ਨੇ ਇਹ ਲਾਜ ਜੱਟ ਦੇ ਨੂੰ ਉਹ ਬੰਦਾ ਇਹ ਕਹਿੰਦਾ ਤਾਂ ਲਈਏ ਕੋਈ ਕੰਨੀ ਕਾ ਕਲਾ ਦਾ ਆਸਪਤਲ ਜਦੋਂ ਉਹਨੇ ਫਿਰ ਕੀ ਕੀਤਾ ਹਾਂ ਉਹ ਬੜੀ ਗੱਲ ਦਾ ਬਸ ਉਹਨੂੰ ਕਹਿੰਦੀ ਸਾਰੇ ਬੜੀ ਦਾ ਤੈਨੂੰ ਐਕਸ਼ਨ ਲੈ ਕੇ ਦਿਖਾਉਂਦਾ ਕੋਈ ਲਾਦਾ ਐਕਸ਼ਨ ਐਕਸ਼ਨ ਕੀਤੇ ਲੈਂਦੇ ਕੌਣ ਲੈ ਲਉਂਦੇ ਹਨ ਕੀ ਰਾਈਟ ਐਕਸ਼ਨ ਲੜਦਾ ਜਿਨ੍ਹਾਂ ਦੇ ਪੱਲੇ ਕੀ ਆ ਹੁਣਾਂ ਇਹ ਤਾਂ ਆਪਣੀ ਇੱਜ਼ਤ ਬਚਾਉਂਦੇ ਰਹਾਂ ਉਹਨਾਂ ਦਾ ਪੜਾਕਾ ਬੰਨ੍ਹ ਲਾ ਝੂੜਦਾ ਨੂੰ ਪਾਕਾ ਆਪੇ ਤੇ ਨਹੀਂ ਉਹਨ ਕੀ ਸੋਪਾ ਉਹਨੂੰ ਬਣੀ ਦੋ ਪਾਕਾ का ਤੇ ਨਹੀਂ ਦੋਹਾਂ ਪਾਸਿਆਂ ਦਾ ਆਪੇ ਤੇ ਧੀਏ ਉਹਨ ਕੀ ਸੋਪਾ ਉਹਨੂੰ ਬਣੀ ਜਿਹੜੇ ਉਹਨ ਕੀ ਸੋਪਾ ਦੂ ਜਿਹੜਾ ਜੀਣਾ ਉਹ ਵੀ ਇਹਦੀ ਸੋਭਾ ਤਾਂ ਫਰਮਿਸ਼ਤ ਨਹੀਂ ਜਾਂਦੀ ਆ ਬਈ ਖਜ਼ਾਨਾ ਜਿਹਦੇ ਕੋਲ ਆ ਉਸਨੂੰ ਜਾਣ ਚਾਹੀਦੀ ਜਿਆਦਾ ਤਾਂ ਸਰਕਾਰ ਨੂੰ ਜਾਣੀ ਚਾਹੀਦੀ ਇਸੋਂ ਪਰ ਆਪੇ ਤੌਤਕ ਕਰੇ ਆਨੰਦ ਚੋਜ ਭਾਵੇਂ ਸੋਭਾ ਇਹਨਾਂ ਨੂੰ ਵੀ ਮਿਲਦੀ ਆ ਜਿਨ੍ਹਾਂ ਦੇ ਵਿੱਚ ਜਿਹਨੂੰ ਗਿਆਨ ਵੱਡ ਜਾਂਦਾ ਸੰਸਾਰ ਦੇ ਵਿੱਚ ਇਹਨਾਂ ਨੂੰ ਵੀ ਸੋਭਾ ਮਿਲਦੀ ਆ ਪਰ ਅਸਲ ਤੇ ਸੋਭਾ ਤਾਂ ਉਹਦੀ ਆ ਨਾ ਜਿਹੜਾ ਜੇ ਤੁ ਆਇਆ ਅਸੰਦੇਹ ਸੋਚਵਾਤਾ ਉਸੇ ਦੀ ਹੈ ਹਾਂ ਜੇ ਤੁ ਗਿਆਨ ਮਿਲੇ ਆ ਸਧਾਰ ਭਾਵੇਂ ਸੱਚੇ ਮਾਰਗ ਚਲਦੇ ਆ ਉਸ ਤੱਕ ਕਦੇ ਨਹੀਂ ਭਾਵੇਂ ਇਹਨਾਂ ਦੀ ਸੋਭਾ ਕਰਦਾ ਹੈ ਪਰ ਸੋਭਾ ਦਾ ਹਸਰਾਰ ਕੌਣਾ ਜਿਹੜਾ ਤੱਕ ਦੀ ਹੈ ਸੋਭਾ ਕੌਣ ਰਬ ਤੇ ਕਿਹਾ ਕੋਣ ਰਬ ਜਿਹੜਾ ਪੂਰਨ ਬ੍ਰਹਮਾ ਉਹ ਦੋਏ ਪਾਸਾ ਕਰਦੀ ਉਹਦੇ ਕੋਲ ਧੋਏ ਗਿਆਨ ਹੁੰਦੇ ਨੇ ਟੈਨੋਲੋਗ ਦਾ ਗਿਆਨ ਵੀ ਉਹਦੇ ਕੋਲ ਹੈ ਆ ਦੂਰ ਬ੍ਰह्म ਗਿਆਨ ਵੀ ਉਹਦੇ ਕੋਲ ਹੈ ਇਹ ਦੋਹਾਂ ਪਾਸਾ ਉਹ ਤਲੀ ਗੁਰੂ ਗ੍ਰੰਥ ਤੋਂ ਪਹਿਲਾਂ ਦੀ ਗੱਲ ਕਹਤੀ ਸਾਥੇ ਤੇ ਪਵਨਾ ਤੇ ਉੱਥੇ ਦਾ ਜਹਸਨ ਪਹੁੰਚੀ ਵੀ ਤਾਂ ਕਰਕੇ ਉਹ ਵੀ ਹੁਣ ਮੰਨ ਲਿਆ ਇਹਨਾਂ ਨੇ ਵੀ ਜਿਹੜੀ ਗੁਰਬਾਣੀ ਕਹਿੰਦੀ ਹੈ ਜਿਆਦਾ ਪੱਤੇ ਦੀ ਗੱਲ ਕਹਿੰਦੀ ਹੈ ਉਹ ਇੱਥੇ ਆਕਰ ਦੋਏ ਇਕੱਠੇ ਹੋਏ ਸਾਨੂੰ ਤਾਂ ਵੀ ਉਹ ਕੁਰਬਾਨੀ ਤੇ ਇਕੱਠੇ ਹੋ ਗਏ ਕਹਿੰਦੀ ਬ੍ਰਿੱਕੀ ਦੀ ਗੱਲ ਕਿਵੇਂ ਕਹੇ ਜੋ ਕੀ ਹੈ ਆ ਗਿਆਨ ਵਾਲੇ ਸਿੱਧੇ ਡਰ ਸਿੱਧੇ ਹੋਰ ਤਰੀਕੇ ਨਾਲ ਇਹਨਾਂ ਨੂੰ ਜਾਂਦਾ ਪਤਾ ਲੱਗਦਾ ਸਾਨੂੰ ਕਿਸੇ ਹੋਰ ਤਰੀਕੇ ਨਾਲ ਪਤਾ ਲੱਗਦਾ ਇਹ ਨਾਲ ਵਰਤਿੰਦੇ ਵੀ ਜਾਂਦਾ ਪਤਾ ਲੱਗਦਾ ਉਹਨਾਂ ਕੋਲ ਵਰਤ ਨਹੀਂ ਹੈ ਨਹੀਂ ਸੀ ਉਹਨਾਂ ਨੇ ਕਿਸ ਤਰੀਕੇ ਨਾਲ ਇਹ ਦੱਸਣਾ ਪਤਾ ਸੀ ਆਮੋ ਗੋਲ ਬਦਲ ਗਿਆ ਨਾ ਗੱਲਾਂ ਉਹਦਾ ਬਹੁਤਾ ਬਹੁਤਾ ਚਲਦੀ ਗਲਤ ਹੈ ਇੱਕ ਦੋਵੇਂ ਪੱਖ ਜੀਵੀ ਦੀ ਗੱਲ ਵੀ ਜੁਰਮਾਨੀ ਜਾਈਏ ਦੋਵੇਂ ਪੱਖ ਜੀਵੀ ਹਾਂ ਤਾਂ ਮੀਂਹ ਆਣੀ ਦੀ ਗੱਲ ਆਈ ਉਹ ਦੁਹਾਗਣ ਦੁਖੀ ਦੋ ਦੋ ਪੱਖੇ ਦੁਖੀ ਹੈ ਦੁਹਾਗਣ ਉਦੇ ਨਾ ਸੰਧਾਰੀ ਗਿਆ ਦੇ ਉਹ ਨਾ ਕਰੀ ਗਿਆ ਉਹ ਧੋਨ ਕਾ ਆਉਤਾ ਉਹ ਤਾਇ ਦੀ ਮੱਸਾ ਨਾ ਆਪਣੇ ਪੜਨਤ ਵਾਲੀ ਉਹ ਪੜਨਤ ਵਾਲੀ ਹੈ ਜਿਹਨੇ ਝੂਠ ਬੋਲੇ ਬਣਦੇ ਸਿੱਧੇ ਦਰਸੀ ਖੜੀ ਹੈ ਉਹ ਉਹ ਸੰਧਾਰੀ ਗਿਆ ਵੀ ਉਹ ਵੀ ਗਲਤ ਹਾਂਜੀ ਆਪੇ ਕੌਤਕ ਕਰੇ ਆਨੰਦ ਚੋਜ ਆਪੇ ਰਸ ਭੋਗਣ ਨਿਰਜੋਗ ਆਪੇ ਕੋਈ ਜਿਹੜੇ ઋષਿ ਮੁਨੀ ਹੋਏ ਨਾ ਇਹਨਾਂ ਨੇ ਲਿਖਿਆ ਸ਼ੇਪਾ ਸ਼ੇਪਾ ਕਿ ਸ਼ਿਵ ਜੀ ਦਾ ਡਾਇਰੈਕਟ ਭਗਤ ਨੇ ਕੋਈ ਗ੍ਰੰਥ ਨਹੀਂ ਲਿਖਿਆ ਇਹਨਾਂ ਨੇ ਗਣੇਸ਼ ਗੁਰ ਲਿਖਣ ਵਾਲਾ ਬਣਾ ਦਿੱਤਾ ਤੇ ਪੱਡਣ ਦੀ ਗੱਲ ਹੈ ਤੇ ਬਾਅਦ ਚ ਇਹਨਾਂ ਨੇ ਪ੍ਰਸਨਾਲ ਬੁਲਾ ਲਿਆ ਜਦੋਂ ਇਹਨਾਂ ਨੇ ਬੈਠਾ ਤੋਂ ਥੱਲੇ ਲਾਉਣ ਹੁੰਦਾ ਗਣੇਸ਼ ਨੂੰ ਨਾਲ ਲੈ ਗਿਆ ग्रह शुरू दिखाई बनाता बोल भारी बना के ग्रंथालु जोड़ता चलिए असल तो जुड़ता ही नहीं ना सीधे समाधि हो गई हां जी आप पे कौतुक करें आनंद चोज आप पे कौतुक करें आनंद चोज आप पे रस भोग निर्जो आप पे कौतुक करें आप तो कौतुक करता आनंद चोज आनंद चोज ਆਪੇ ਰਾਸਕੋਗਨ ਜੋ ਜਿਹੜੇ ਕੌਤਕ ਦੇ ਉਹ ਤਾਂ ਮੇਰਾ ਗਰੀਬੀਆਂ ਦੇ ਲੈ ਭਾਣਾ ਬਸਦਾ ਪਕਾ ਨੇ ਆ ਕੌਤਕਨ ਦੇ ਜੋ ਚਲੇ ਕਰਦਾ ਇਹ ਵੀ ਬ੍ਰਹਮ ਇਹ ਬ੍ਰਹਮ ਹੋਰ ਰੂਪ ਦੇ ਵਿੱਚ ਜਾਂ ਰਾਸਕੋਗਨ ਜੋ ਹੋਗਾ ਉਹ ਦੂਗੇ ਰੂਪ ਦਾ ਸਧਾਰੀ ਰੂਪ ਦੇ ਵਿੱਚ ਰਾਸਕੋਗਨ ਜੋ ਹੋਗਾ ਜੋ ਵਹਾਂ ਦੀ ਉਸੇ ਜਦ ਕੋਤਕੰਦ ਹੋਦਾ ਹੈ ਆਪੇ ਕੋਤਕ ਕਰੇ ਅਨੰਦ ਵਿੱਚ ਕੋਤਕ ਅਨੰਦ ਵਿੱਚ ਕੋਤਕ ਕਰਨ ਕੋਤਕ ਕਰਦਾ ਇਹਦੇ ਵਿੱਚ ਜਿਵੇਂ ਪਕ ਪਕਤੀਲਾ ਹੱਸ ਕਰਦਾ ਭਗਤ ਹੋਵੇ ਕੋਤਕ ਕਰਦਾ ਜਿਵੇਂ ਕਬੀਰ ਕੋਟਕ ਹੱਥੋਂ ਰੁੱਟਿਆ ਗਿਆ ਨੇ ਬੰਦੇਆ ਰਹਾਗਾ ਨਹੀਂ ਬੰਦੇ ਬਲਾਦੋਂ ਲਾਗਾ ਤਰੂਡ ਮਡ ਲਾਗਾ ਨਹੀਂ ਬੰਦੇ ਕੋਸ ਚੀ ਉਹਪੜਾ ਨੰਦ ਚਾ ਉਹ ਦੇਖਦਾ ਚੋਜ ਦੇਖਦਾ ਚੋਜ ਉਪਰੀਤਮ ਦੇ ਚੋਜ ਦੇ ਉਹਦਾ ਕਹਿੰਦਾ ਦੇਖਣਾ ਜਦ ਇਹ ਵੀ ਚੋਜ ਦੇਖਦੇ ਆ ਠੀਕ ਐ ਤੇ ਜੋ ਕੀ ਕੱਢੂਗਾ ਸੱਪ ਦਮਾ ਚਲੋ ਬੰਦੂ ਨੇ ਬੋਟਲੀ ਬੰਦ ਕਰਕੇ ਤੇ ਪਾਇਆ ਹੋਇਆ ਉਹਦੇ ਹੁਕਮ ਨਾਲੇ ਆ ਇਹਦੇ ਵਿੱਚ ਦੇਖਨੇ ਆ ਕੀ ਦੇਣਾ ਚਾਹੁੰਦਾ ਸੰਸਾਰ ਇਹਦੇ ਸੰਸਾਰ ਨੂੰ ਕੀ ਸਿੱਖਿਆ ਦੇਣੀ ਚਾਹੁੰਦਾ ਕੈਪੀਟ ਹੋ ਗਏ ਲੋਕ ਤੋਏ ਬੰਦਾਂ ਤੇ ਉਦੋਂ ਆਖੀ ਪੂਰੇ ਛੱਡੇ ਦੇ ਕਿਨੋਂ ਤੇ ਕਬੀਰ ਬਾਕੀ ਵੀਰ ਨਾਲ ਦਿੰਦਾ ਆਵਾਜ਼ ਕੈਪੀਟ ਹੋ ਗਏ ਦੇਰ ਤੱਕ ਖੜਾ ਆਪ ਹੋ ਛੇੜਿਓ ਨਾ ਇਹਨਾਂ ਨੂੰ ਜੋ ਮਰਜ਼ੀ ਕਰੀ ਜਾਣ। ਜਈ ਸਾਰਾਂ ਦਾ ਕਿਹਦੇ ਤਰੇ? ਹਾਂ। ਜਿਹੜਾ ਸੰਦੇਪਾ ਜੀ ਆਕੇ ਘਟਨਾ ਬਣਦੀ। ਪੰਜਵੇਂ ਪਾਸੇ ਆਕੇ ਫੇਰ ਦੁਬਾਰਾ ਇਹਨਾਂ ਨੇ। ਹਾਂ। ਫੇਰ ਦੁਬਾਰਾ ਆਕੇ ਚੱਲ। ਫੇਰ ਵਿੱਚ ਡਿਸਆਰਡਰਡ ਤੋਂ ਨਾ ਦਾ ਫੇਰ ਫਰਕਾ ਨਵੇਂ ਬਾਸ਼ਾ ਕਰਦਾ ਹਾਂ ਨਵੇਂ ਬਾਸ਼ਾ ਵਲੇ ਫੇਰ ਜਦੋਂ ਜੰਦੂ ਭੇਜੇ ਤਾਂ ਡਰ ਗਏ ਕਾਬੀਆਂ ਮੇਰੇ ਆਇਆ ਹੈ ਫਿਰ ਗਲਤੀ ਮਾਨ ਕੇ ਫੇਰ ਦੇ ਦਿੱਤਾ ਇਹ ਸ਼ਰਾਰਤ ਹੋਈ ਹੈ ਉਹਦੇ ਬਾਅਦ ਉਸ ਬਾਸ਼ਾ ਵਲੇ ਜੋ ਹੋਇਆ ਉਹ ਬਾਈ ਤਾਂ ਕੀਤਾ ਜਾਂ ਵਜੀਦੇ ਨਾ ਕਰਤਾ ਰਾਂਝੇ ਵੇਲੇ ਘਾਟਾ ਖਜਾਨਾ ਹੋਣਾ ਕਿਸੇ ਆਦਮੀ ਦੀ ਮਤ ਮਾਦੀ ਜਾਂਦੀ ਹੈ। ਇਹ ਜਦ ਨੂੰ ਹਮੇਸ਼ਾ ਰਹਿੰਦੇ। ਰਾਂਝੇ ਆਪਣੇ ਫੇਰਵਾਨੇ ਆ ਵੀ ਗਲਤੀ ਹੋਈ ਹੈ। ਮੈਂ ਸਜਾ ਦੋਸਤ ਤੁਸੀਂ ਮੇਰੇ ਕੋਲ ਆ ਜਾਓ। ਰਾਂਝੇ ਫਿਰ ਤਿਆਰ ਸੀ। ਰਾਂਝੇ ਦੇ ਬੁੱਢੇ ਨੂੰ ਸਜਾ ਜਿੱਤੀਏ ਦਵਾਈਓ ਜੇ ਨਾਲ ਰੱਖੇ। ਬਾਦਰ ਸ਼ਾਹ ਨੇ। ਬਾਦਰ ਸ਼ਾਹ ਨੇ। ਬਾਦਰ ਸ਼ਾਹ ਨਾਲ ਨਾਲ ਉਹ ਤਾਂ ਵੀਰ ਦਾ ਮਰੇ ਸੀ। ਫੇਰ ਗੁਰੂ ਘਰ ਨਾਲ ਫੇਰ ਪਾੜਦਾ ਇਹਨਾਂ ਨੇ। ਪੁਰੂ ਕਰਦੇ ਇਹਨਾਂ ਨਾਲ ਫੁੱਟੇ ਰਹੀ ਆ ਅਟਕ ਕਈ ਵਾਰ ਪੜੀਏ ਤਕੂ ਬਤਾਲਾ ਦੂਏ ਪੜਦਸੇ ਦੂਏ ਤੇ ਕਟੜਵਾਤੀ ਆ ਪੜਦਾ ਜਿਹੜੇ ਹੀ ਰੋਤੀ ਉਹਨਾਂ ਦੀ ਤਾਜ਼ਾ ਜਿਆਦਾ ਸੀ ਪੜਦਸੇ ਕੋਈ ਨੁਕਰੀ ਅਜੀ ਚਾਲ ਚੱਲਦੇ ਸੀ ਫੇ ਫੜ ਜਾਂਦੇ ਹਾਂਜੀ ਆਪੇ ਕੌਤਕ ਕਰੇ ਅਨੰਤ ਜੋਜ ਆਪੇ ਰਸ ਭੋਗਣ ਨਿਰਜੋਗ ਆਪੇ ਰਸੋ ਖੰਗਰ ਜੋਗ ਆਪੇ ਰਸੋ ਖੰਗਰ ਉਹ ਤਾਂ నిర్యోగ ਹੈ। ਉਹ ਜੋਗ ਨਹੀਂ ਹੁੰਦਾ। నిర్యోగ ਹੈ ਆਪਣੇ ਆਤਮਾ ਨਾਲ ਹੀ ਆਪਣੇ ਮੂਰਤ ਨਾਲ ਜੁੜਿਆ ਹੋਇਆ। ਜਿੰਨੇ ਜਨ ਰਾਸ ਭੋਗੀ ਹੋ ਜਾਂਦਾ। ਜਿੰਨਾ ਜਨ ਰਾਸ ਭੋਗਦਾ ਹੈ నిర్యోగ। ਉਹ ਹੈ। ਨੈਗੇਟਿਵ ਜੋਗ ਹੈ ਮਾਇਆ ਨਾਲ ਸਰੀਰ ਨਾਲ ਜੁੜਿਆ ਹੋਇਆ। ਸਰੀਰ ਦਾ ਜੋਗ నిర్యోగ ਹੁੰਦਾ। నిర్యోగ ਦਾ ਮਤਲਬ ਇਹ ਨਹੀਂ ਵੀ ਜੁੜਿਆ ਹੋਇਆ ਨਹੀਂ ਕਿਤੇ। ਯੋਗ ਹੈਗਾ ਪਰ ਸ੍ਰੀ ਮਾਇਆ ਨਾਲ ਜੁੜਿਆ ਹੋਇਆ ਉਹ ਦੋ ਨੈਗੇਟਿਵ ਯੋਗ ਆਉਂਦਾ ਜੁੜਿਆ ਹੋਇਆ ਮਾਇਆ ਨਾਲ ਜੁੜਿਆ ਹੋਇਆ ਮਾਇਆ ਕਹਦਾਗਾ ਦੇਵਨ ਨਾ ਹੋਇਆ ਹੋਇਆ ਮੈਂ ਦੇ ਅੰਦਰ ਭੁਗੀਆਂ ਅੰਦਰ ਭੁਗੀਆਂ ਜੋਗੀ ਅੰਦਰ ਜੋਗੀ ਆ ਵੀ ਆਇਆ ਹਾਂ ਇਸ ਭਾਵੇਂ ਇਸ ਆਪਣਾ ਲਾਵੇ ਜਿਸ ਭਾਵੇਂ ਇਸ ਖੇਲ ਖਿਲਾਵੇ ਤਕੋ ਖੇਲ ਖਿਲਾਵੇ ਜਿਸ ਭਾਵੇਂ ਜਿਹੜਾ ਤਾਂ ਚਾਹੁੰਦਾ ਖੇਲ ਖੇਲਣਾ ਮਾਇਆ ਦਾ ਉਹਨੂੰ ਤਾਂ ਮਾਇਆ ਦਾ ਖੇਲ ਖਿਲਾ ਦਿੰਦਾ ਜਿਹਨੂੰ ਭੌਂਦਾ ਜੋਗ ਪਰਮੈਸ਼ਰ ਉਹ ਨਹੀਂ ਭੌਂਦਾ ਪਰਮੈਸ਼ਰ ਤਾਂ ਜਿਵੇਂ ਮੈਨੂੰ ਭੌਂਦਾ ਉਹ ਕਰਦਾ ਜਿਸ ਭਾਵੇਂ ਇਸ ਆਪਣੇ ਨਾਂ ਨਾਲ ਆਖਾਂ ਮੰਨਦਾ ਨਾਮ ਦੀ ਆ ਉਹਨੂੰ ਨਾਮ ਆਪਣੇ ਲੋਗ ਨੂੰ ਲਾ ਦਿੰਦਾ ਜੋ ਨਾਮ ਦੇ ਦਿੰਦਾ ਜੋਛੇ ਜੋਈ ਜੋ ਆਤਮਾ ਆ ਦਿਖੜ ਗਈ ਜਾਂ ਉਹ ਵੇਖੜ ਗਈ ਕਿਹਦਾ ਦਿੰਦਾ ਤਵੇ ਨੂੰ ਇਹ ਹੈ ਲਾ ਦੋਏ ਪਾਪ ਦਾ ਆਪੇ ਤੇ ਆਪੇ ਦੇ ਨਹੀਂ ਉਹ ਮਾਇਆ ਦਾ ਗਿਆਨ ਦੇ ਜਾਂਦਾ ਔਰ ਆਤਮਾ ਗਿਆਨ ਦੇ ਜਾਂਦਾ ਤੈਨੂੰ ਖੋਲ ਕੇ ਘੇੜ ਜਾਏ ਇਧਰ ਘੇੜ ਲਾ ਜਾਏ ਇਧਰ ਘੇੜ ਲਾ। ਜਿਸ ਭਾਵੇ ਤੇ ਸਾਪਨ ਆਇ ਲਾਵੇ ਜਿਸ ਭਾਵੇ ਤੇ ਇਸ ਖੇਲ ਖਿਲਾ ਰਿਹਾ। ਬੇਸ਼ਮਾਰ ਅਥਾ ਅਗੰਤ ਅਟਲ ਹੈ। ਹੋ। ਬੇਸ਼ਮਾਰ ਅਥਾ ਅਗੰਤ ਅਟਲ ਹੈ। ਬੇਸ਼ਮਾਰ ਅਥਾ ਅਗੰਤ ਅਟਲ ਫੇਰ ਕੋਈ ਘੰਟੀ ਨਹੀਂ ਕਿੰਨਾ ਨੂੰ ਇਕੱਠਾ ਹੀ ਘਲਾ ਰਿਹਾ ਹੈ ਇੱਕਦਮ ਜੇ ਕਾਜ਼ੀ ਘੰਟੀ ਘਲਾਵੇ ਅਗਲਾ ਤਾਂ ਘੰਟੀ ਤੋਂ ਰਾਤ ਵੇਨੇ ਸਾਰਿਆਂ ਨੂੰ ਇਕੱਠਾ ਹੀ ਘਲਾ ਰਿਹਾ ਇੱਧਰ ਖੇਡ ਲੱਗੇ ਇੱਧਰ ਖੇਡ ਲੱਗ ਪਟੋਲਾ ਇਹ ਬਦੀ ਵੇਟੇ ਤੱਕ ਘਲਾਦਾ ਜਿੱਥੇ ਮਰਜੀ ਹੁੰਦੇ ਖੇਲ-ਖੋਲ ਬਹੁਤ ਹੈ ਦੋ ਨੀ ਉਹ ਕੋ ਖੱਟਾ ਹੈ ਢੋਰ ਬੜੀ ਵੱਡੀ ਹੈ ਪਰ ਐਡੀ ਤਾਂ ਇੱਥੇ ਤੇ ਕੋਈ ਖੇਲੇ ਨਹੀਂ ਸਕਦਾ ਕਿਉਂ ਬੁਲਾਉਂ ਤੂੰ ਨਾਨਕ ਦਾਸ ਬੋਲਦਾ ਨਾਨਕ ਦਾਸ ਕਹਿੰਦਾ ਵੀ ਮੈਂ ਨਹੀਂ ਆਪਣੇ ਕੋਲੋਂ ਕੁਝ ਵੀ ਕੀਤਾ ਮੈਨੂੰ ਤਾਂ ਜੋ ਕਹਾਇਆ ਉਹੀ ਕਹੀਏਗਾ ਇਹ ਗੱਲ ਕਰਾਮਾਤੀ ਹੈ ਵੇਸ਼ਮਾਰ ਅਥਾਰ ਅਥਾਰ ਅਗਰਾਂ ਇਹ ਕਹਿੰਦਾ ਉਹਨੇ ਕਹਾਇਆ ਕਿ ਮੈਂ ਨਹੀਂ ਆਇਆ ਇਹ ਔਲੇ ਮਾਰ ਤੈ ਕਿਦੂ ਵੀ ਪਤਾ ਆਉ ਉਹਨੇ ਬੁਲਾਇਆ ਆ ਗੈਰਤੂ ਜੇ ਤੱਕ ਬੱਧੀ ਟਰੇਲਵੇ ਕੋਈ ਬੇਰੇ ਕੋ ਕੋਈ ਘਾਟਾ ਇਹ ਤਾਂ ਕੁਝ ਨਹੀਂ ਬੋਕਦਾ ਬਿਨ ਬਣਾ ਤੋਂ ਲੈ ਬਣਾ ਤੇ ਇਹ ਸਭ ਕੁਝ ਹੁੰਦਾ ਕੁਦੇ ਕੁਦਾ ਦੱਸਦਾ ਜਿਹੜਾ ਮੱਥੀ ਕਹਿਣ ਮੰਗਲਾ ਹੈ ਬੋਕਦਾ ਕੁਝ ਹੋ ਨਹੀਂ ਤੇ ਨਾਮ ਉੱਤੇ ਉੱਚੇ ਤੋਂ ਉੱਚਾ ਬ੍ਰੇਤ ਤੇ ਬ੍ਰੇਖ ਹੋਈ ਜਾਣਾ ਉਹ ਥੱਕ ਜਾਏਗਾ ਇਦਾਂ ਥੱਕਣ ਦਾ ਥਕਣ ਦਾ ਕੁਝ ਵਧੀਆ ਇਹ ਗੱਲ ਨਾਨਕ ਕਦੇ ਨਹੀਂ ਕਹੀ ਇਹ ਕਹਾਈ ਹੋਈ ਕਹੀ ਹੈ ਜੋ ਬਲਾਉਂ ਤੋਂ ਨਾਨਕ ਦਾ ਸਰੂਪ ਰੂਪ ਤੇ ਬੇਸ਼ੁਮਾਰ ਉਹ ਤਾਂ ਦੀਦ ਜੋ ਕਰ ਰਿਹਾ ਜੋ ਤਾਂ ਸਾਹਮਣੇ ਉਹ ਤਾਂ ਦਸ ਦੇਖ ਕੇ ਦੇਖ ਤਾਂ ਸਾਹਮਣੇ ਨਹੀਂ ਹੈ ਤਾਂ ਕਦੇ ਇੱਕ ਮਿੰਟ ਹੋਈ ਕਿਸ ਵੇਸ ਤੇ ਕਹੀ ਜਦ ਦੇਖਾਂ ਦਬ ਫਿਰ ਆਦਾ ਦੇਖਿਆ ਦੀ ਹੈ ਜੇ ਤੇ ਬੇਸ਼ਮਾਰ ਕਹ ਤਾ ਅਗਣਤ ਕਹ ਤਾ ਦੇਖਿਆ ਜੀ ਫਿਰ ਮਤੋਂ ਲੋਕ ਐ ਕਿਵੇਂ ਕਹ ਤੋ ਕਿਵੇਂ ਕਹ ਤਾ ਇਹ ਤਾਂ ਇਹ ਤਾਂ ਦੇਖੇ ਤੇ ਬਾਹਰ ਦੀ ਗੱਲ ਐ ਕਿਉਂ ਦੇਖੇ ਤੇ ਬਾਹਰ ਦੀ ਗੱਲ ਐ ਕਹ ਤੋ ਬਲਾਇਆ ਬੋਲਿਆ ਸਵਾਲ ਖੜਾ ਹੋ ਸਕਦਾ ਸੀ ਇੱਥੇ ਸਵਾਲ ਕਿਤੇ ਖੜਾ ਹੋ ਉਹ ਜਗ੍ਹਾ ਦੀ ਛੱਡੀ ਹੋਈ ਪਰ ਇਹਨਾਂ ਦੀ ਬੁੱਧੀ ਸਵਾਲਾਂ ਦੀ ਤਾਂ ਹਈ ਉਹ ਨਹੀਂ ਸੱਟ ਜਾਂਦੀ ਕਿੱਥੇ ਆ ਪਿੱਛੇ ਕਹਿੰਦਾ ਜਦ ਦੇਖਤਾ ਦੇਖਿਆ ਹੈ ਨਹੀਂ ਇਹ ਤਾਂ ਬੁੱਧੀ ਤੋਂ ਪਰੇ ਬੁੱਧੀ ਤੋਂ ਪਰੇ ਅੜਿਆ ਨਾ ਜੇ ਨਿਆਣੇ ਉਹਨਾਂ ਬਾਤ ਕਿਹ ਜੋਂ ਬਲਾਵੋ ਤੂੰ ਦੋਸਤ ਬੋਲੇ ਕੁਝ ਜੋ ਦੇਖਿਆ ਉਹ ਆਇਆ ਜੋ ਦਹੀਂ ਦੇਖਿਆ ਉਹ ਬੁਲਾਇਆ ਬੋਲੇ